ਗੁਰਪ੍ਰਸਾਦ ਆਪ ਨੂੰ ਆਪ ਸੁਕੇ ਇਨਕੀ ਜਾਨੋ ਤ੍ਰਿਸ਼ਨਾ ਗੁਲੇ ਪਰ ਪ੍ਰਸਾਦ ਆਪ ਦੇ ਦੇ ਖੁਲੇ ਆਪਰਾ ਗੁਰਪ੍ਰਸਾਦ ਆਪਣਾ ਤੇ ਗਿਆਨੇ ਨਾ ਹੋ ਗਿਆ ਆਪ ਸੁਕੇ ਕਿ ਆਪਣਾ ਜਿਹੜਾ ਸਰੀਰ ਉਹਦੀ ਸੋਚੀ ਹੋ ਗਈ ਸਭ ਆ ਗਈ ਇਨਕੀ ਜਾਨੋ ਤ੍ਰਿਸ਼ਨਾ ਹੁੰਦਾ ਆਇਆ ਤਾਂ ਆਪ ਹੀ ਦੱਸੀ ਜਾਂਦੀ ਹੈ ਕਿਹੜੀ ਉਹਦਾ ਮਤਲਬ ਉਹ ਅਜਾ ਬੱਦ ਕੇ ਦਿੱਤੀ ਹੋਈ ਐਂ ਚਲਦੀ ਹੁੰਦੀ ਹੈ ਹੋਲੀਆਂ ਪਰ ਪੜ ਲੱਗਾ ਬੜੀ ਚਲਦੀ ਹੈ ਆਹ ਲੱਗਾ ਹਾਂਜੀ ਗੁਰਪ੍ਰਸਾਦ ਆਪਣਾ ਆਪ ਸੁਝੇ ਉਹ ਹਰ ਜਨ ਰਹਤ ਜੇਦਾ ਆਪਣੇ ਮਨ ਨੂੰ ਸਾਧ ਕੇ ਹਰ ਜਸ ਕਹਿਣ ਲੱਗਿਆ ਹਰ ਜਸ ਦੀ ਗੱਲ ਕਰਨ ਆ ਗਿਆ ਮਾਨਵਤਾ ਸਰਬ ਰੋਗ ਤੇ ਉਹ ਜਿਹੜ ਹਰ ਜਨ ਰਹਤ ਰੋਗ ਤੇ ਰੈਡ ਹੋ ਜਾਂਦਾ ਸਰਵਰੋਗ ਤੇ ਉਹ ਹਰ ਜਨ ਦਾ ਹੈ ਤੇ ਹਰ ਜਨਾ ਹੋ ਵਾਰਜਨ ਕੀਰਤਨ ਕੇਵਲ ਬੋਣਾ ਸਰਵਰੋਗ ਹੰਕਾਰ ਨੂੰ ਕਾਇਮ ਨਹੀਂ ਕੋਈ ਹੰਕਾਰ ਜਾਂਦਾ ਸਰਵਰੋਗੇ ਚਲੇ ਜਾਂਦੇ ਨੇ ਉਜਾਲਾ ਨਾ ਹਕਾਰ ਪਰਮਰੋਗ ਨਹੀਂ ਹੈ ਉਹ ਬਰੇ ਰੋਕਿਆ ਹੋਇਆ ਰੋਣ ਨਾ ਬਸ ਇਹ ਹੋ ਜੀਏ ਤਾਂ ਉਹਦਾ ਰੋਸ਼ਨੀ ਦੀ ਆਨ ਹੋਦਾ ਪਰ ਰੋ ਕੇ ਫਿਰ ਉਹ ਗੁੱਸਾ ਵੀ ਹੋ ਜਾਂਦਾ ਹਾਂਜੀ ਆਨੰਦ ਕੀਰਤਨ ਕੇਵਲ ਵਿਖਿਆਨ ਗ੍ਰਸਥਮੈ ਸੋਈ ਨਿਰਵਾਣ ਆਨੰਦ ਕੀਰਤਨ ਕੇਵਲ ਵਿਖਿਆ ਜਦੋਂ ਦੈਨਾ ਹਾਤਾ ਕੇਵਲ ਕੀਰਤਨ ਦਾ ਵਿਖਿਆਨ ਹੀ ਆਜ਼ੀ ਦਾ ਮਤਲਬ ਹੈ ਕਿੱਤਾ ਰਹੇ ਜਾਂਦਾ ਆਜ਼ੀ ਦਾ ਆਜ਼ੀ ਦੀ ਰੁਚੀ ਖਾਂ ਜਾਂਦੀ ਹੈ ਜੀ ਆਜ਼ੀ ਦੀ ਭੁੱਖ ਮਾਂ ਜਾਂਦੀ ਹੈ ਆਨੰਦ ਕੀਰਤਨ ਕੇਵਲ ਕੀਰਤਨੋਂ ਦੀ ਭੁੱਖ ਮਾਂ ਜਾਂਦੀ ਹੈ ਕੀਰਤਨ ਹੈ ਸੋਈ ਨਿਰਵਾਣ ਜੀ ਉਹਦੇ ਨੂੰ ਚੀਭਾਂ ਜਾਂਦੀ ਜਾਂਦਾ ਭੁੱਖ ਮਾਂ ਜਾਂਦੀ ਹੈ ਇਸ ਤੋਂ ਅਸੂਲ ਨਿਰਵਾਣ ਨਿਰਵਾਣ ਦਾ ਜੀ ਦੇ ਬਾਰੇ ਹਮ ਕੁਛ ਜਾਣੀਅਤ ਅਕੇਲੀ ਨੋ ਬੋਚਾ ਨਿਰਵਾਣ ਕਰ ਕੁਛ ਕਹਾਤਾ ਨਾ ਸੁਣੋ ਕੀ ਹੈ ਹੋ ਜਾ ਗ੍ਰਸਥ ਮਾ ਜੁਹੀ ਨਿਰਵਾਣ ਤੇ ਉਹ ਹਰ ਜਾਣ ਸਾਧ ਸੰਗੇ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਾਣ ਬੈਤ ਸਰਬ ਰੋਗ ਤਾਂ ਦੂਰ ਹੋ ਗਏ ਕਹਾਂ ਕੀ ਜਾਣਾ ਬੜਿਆ ਸੇਜਕ ਹੋ ਰਹੀ ਜੀ ਸੇਜਾ ਪਈ ਜਾ ਰੋਗ ਪਹਿਲਾਂ ਖਤਮ ਹੋਉ ਅੱਗੇ ਕੀ ਹੈ ਕੇਵਲ ਵਿਖਿਆਨ ਸਾਰਾ ਰੋਗ ਤੋਂ ਬਾਅਦ ਆ ਕੰਮ ਸ਼ੁਰੂ ਹੋਣਾ ਹੈ ਅੰਦਰ ਕੀ ਜੀ ਪਰ ਇਹੋ ਕੀ ਕਹੇ ਇਹ ਜਦੋਂ ਸਾਨੂੰ ਕੀ ਕਹੇ ਇਰੇ ਸਮੇਸ ਹੋਈ ਦੇ ਬਾਅਦ ਵਾਹ ਇਹਦੇ ਬਾਅਦ ਜਿਹੜਾ ਸਪਿ ਰਿਟਾ ਹੈ ਗਈ ਉਹ ਉਹਦੇ ਬਾਅਦ ਨਹੀਂ ਕੁਝ ਦੱਸਿਆ ਮੁੱਦਸਨ ਦੀ ਲੋੜ ਉਹ ਕਹਿੰਦੇ ਸੇ ਜਾਪ ਪਾਉਂਰਵਾਨ ਬੋਲਣ ਦੇ ਪਰੇ ਚਲੀ ਗਈ ਗੱਲ ਹਾਂ ਜੇ ਮੈਂ ਨਾਮ ਦਾ ਵਖਿਆ ਨਹੀਂ ਹੋ ਸਕਦਾ ਉਹ ਦਾ ਉਹ ਨਾਮ ਦੇ ਦੀਨ ਹੈ ਸੱਚੇ ਉਹ ਲਈ ਨਾ ਜੋ ਜਬ ਤੋਂ ਸਮਾਵੇ ਇਸ ਕੱਢ ਕੇ ਉੱਥੇ ਬੋਲਤੀ ਬਣਦਾ ਉਹ ਅਸਰਵ ਰੋਕਤੇ ਜਦ ਰਾਤ ਹੋਣਾ ਹੋਪੇ ਨਾਵਾਂ ਨਾਲ ਵਿਰੋਧ ਅਭੋਜ ਨਾਲ ਨਾਮ ਸੁਮਾ ਜਾ ਤਾਂ ਉਹਦੇ ਬਾਰੇ ਹੁਣ ਕੀ ਕਹੀਏ ਉਹ ਅਗਲੀ ਸੇਜ ਉੱਥੇ ਕੀ ਆ ਜਾਂਦਾ ਸੇਜ ਫਾਇਦਾ ਬ੍ਰਹਤੀ ਹੋ ਸੰਸਾਰ ਦੇ ਔਰ ਬੇਦਨਾ ਜਾਣਾਂ ਮਾਰਦੇ ਹੋ ਉਦ ਵੀ ਹੀ ਗਿਆ ਉਹ ਪਾਸ ਤੇ ਹੈਗਾ ਬੇਦਨਾ ਜਾਣੇ ਭਾਈ ਜੀ ਉਹ ਗੱਲ ਹੈ ਉਹ ਹੋਰ ਨਹੀਂ ਬਿਚਾਰ ਕੋਈ ਕੁਝ ਹਿੱਕਾ ਨਹੀਂ ਲੱਗਦਾ ਹੋ ਜਾਓ ਬਸ ਇਸ ਵਿੱਚ ਹੋ ਸੋਈ ਲਗਵਾਓ ਇੱਕ ਉੱਪਰ ਜਿਸ ਜਨ ਆਸਾ ਿਸਕੀ ਕਟਿਏ ਜੰਕੀ ਫਾਸਾ ਇੱਕ ਉੱਪਰ ਜਨਕੀ ਆਸਾ ਜਿਉਂ ਇੱਕ ਤੇ ਆਸ ਹੈ ਜਿਨਕੀ ਆਸਾ ਜਿਸ ਦੀ ਕਟਿਏ ਜਨਰ ਬਸੋ ਉਹ ਜੇ ਉਹ ਜਿਹੜਾ ਸ਼ਬਦ ਨੂੰ ਆਉਂਦੇ ਆਸ ਹੈ ਜਿਉਂਦੀ ਬਣੀ ਰਹੇ ਉਸ ਮੰਦੀ ਜਿਹਦੇ ਬਾਰੇ ਕੋਈ ਸ਼ਾਇਦ ਹੀ ਸੰਦੇਣਾ ਇਹ ਇੱਥੇ ਆਸ ਖੜੀ ਹੈ ਉਹਦੀ ਸਰਦਾਂ ਨਾਲ ਜੁੜਿਆ ਰਿਹਾ ਇਹ ਤਾਂ ਹਟਿਆ ਨਾ ਹੀ ਜੇ ਕੋਈ ਜਗਤੀ ਫਸੀ ਦਿੱਤੀ ਕੋਈ ਕਿਤੇ ਜੰਗ ਨਹੀਂ ਪਾਰ ਬ੍ਰਹਮ ਕੀ ਜਿਸਮਨ ਭੁੱਖ ਨਾਨਕ ਤਿਸੇ ਨ ਲਾਗੇ ਦੂਸਰ ਪਾਰ ਬ੍ਰਹਮ ਦੀ ਤਾਂ ਅੰਦੇ ਚੇ ਏ ਭੁੱਖੇ ਹੋਵੇ ਜੇ ਪਾਰ ਪਾਰ ਮਾਤੇ ਹੋਵੇ ਭੁੱਖ ਪੈਦਾ ਹੋਵੇ ਠੋਖਾ ਦੌੜ ਨਹੀਂ ਲੱਗਦਾ ਛੱਟ ਲੈ ਆਏਗਾ ਬਾਰ ਬਰ ਬ ਉਹਦਾ ਬਾਰ ਬ ਉਹਦਾ ਬਹੁਤ ਵਿਚਾਰ ਚ ਲੱਗ ਗਿਆ ਕਹਿੰਦੇ ਕਾ ਛਡੋ ਤੁਸੀਂ ਉਹ ਤਾਂ ਨਰਵਾਨ ਹੈ ਬਾਰ ਬਣ ਜੇ ਭੁੱਖੇ ਪੈਦਾ ਹੋਏ ਤੇ ਤਾਲੀ ਦੇ ਅੰਦਰ ਭੁੱਖੇ ਬੜੀ ਖਤਨਾ ਹੋ ਗਿਆ ਜੇ ਭੁੱਖ ਪੈਦਾ ਹੋ ਜਾਏ ਉਹ ਬੜੀ ਖਤਨਾ ਹੈ ਦੁਖਾਫਤ ਸੋਹਰਾ ਭਜਦੇ ਨੇ ਜੇ ਉਹ ਅੰਗਲਾ ਜਾਂ ਬੜੇ ਕੋਕੜਾ ਨੇ ਉਹ ਕਹੂਗਾ ਦੂਹੇ ਨੂੰ ਬਾਲੇ ਵਰਗਾ ਉਹ ਜੂਆ ਖੋਗਾ ਨਾ ਦੂਹੇ ਨੂੰ ਬਾਲੇ ਵਰਗਾ ਐਵੇਂ ਉੱਗੜ ਭਜਦੇ ਨੇ ਪੂਰੇ ਪੂਰੇ ਫਿਰ ਜਿਨਾ ਇਹ ਬਾਜੋਤਾ ਬਾਜੋ ਕੋਈ ਬੜਾ ਇਲਾਕਾ ਬਣ ਬਾਰ ਬ੍ਰਹਮ ਕੀ ਜਿਸਮ ਨੂੰ ਭੂਖ ਨਾਨਕ ਜੀ ਸੇ ਨਾ ਲੱਗੇ ਗੋਣ ਕਾ ਨੂ ਦੋਖੇਂ ਲੱਗਦਾ ਫੇਰ ਪਾਰ ਬੀ ਜੀ ਗੁਰ ਪ੍ਰਸਾਦ ਆਪਨਾ ਆਪ ਸੁਝੇ ਜਾਨੋ ਤ੍ਰਿਸ਼ਨਾ ਭੁਜੇ ਪਰ ਜਦੋਂ ਇੰਨਾ ਗਿਆਨ ਸਾਨੂੰ ਹੋਵੇ ਸਾਡੇ ਮੂਹਰੇ ਕਿੰਨਾ ਸੀ ਗਿਆਨ ਹਾਸਲ ਕਰ ਲਈਏ ਜਿਹੜਾ ਨਾ ਸਾਨੂੰ ਆਪਣੇ ਆਪ ਦੀ ਸੋਚ ਹੋ ਜੇ ਆਪਣਾ ਜੋ ਦਿਰਾਗਾ ਆਪਣੇ ਮਨ ਤੋਂ ਪਛਾਣ ਲਿਏ ਵਾਹ ਮਨ ਤੋਂ ਬੰਦ ਹੋਸਤਾ ਨੂੰ ਮਨ ਤੇ ਗੋਲ ਨੂੰ ਇਹ ਸਭ ਸੋਚੀ ਹੋਈ ਗੱਲ ਸਮਝ ਆਈ ਇਹ ਸਭ ਜਗ ਵਿੱਚ ਤ੍ਰਿਸ਼ਨਾ ਬੁਣੀ ਹੈਂ ਤੇ ਇਹ ਹੋਣੀ ਬਹੁਤ ਤ੍ਰਿਸ਼ਨਾ ਗੁਰਪ੍ਰਸਾਦ ਆਪਨ ਆਪ ਸੂਝੇ ਗਿਆਨ ਹੋ ਜਵੇ ਜੇ ਆਤਮਾ ਅੰਦਰ ਤੇ ਸਰੀਰ ਅੰਦਰ ਸਾक्षात ਆਤਮਾ ਅਟ ਦੇਗੀ ਜਿਵੇਂ ਗਿਆਨਤਾਰ ਆਤਮਾ ਅਟ ਦੇਂਗੇ ਨਾ ਉਹ ਦੇਖਦੇ ਨੇ ਨਸ਼ਾ ਕਰਨ ਵਾਲੇ ਗੁੱਟੇ ਉਹ ਗਿਆਨਤਾਰ ਇਹ ਗਿਆਨ ਹੋਵੇਗਾ ਅਗਿਆਤਤਾ ਨਾ ਦਿਖੇ ਉਹਨਾਂ ਪਤਾ ਨਹੀਂ ਚੀਜ਼ੀ ਕਿ ਉਹ ਕੁਦਰਤ ਗਿਆਨ ਕਰਨਾ ਕੀ ਹੈ ਕੀ ਕਹਾਂ ਸ਼ਬਦ ਕੀ ਹੈ ਸ਼ਬਦ ਇਹ ਸਮੋਲ ਇਹ ਤਾਂ ਫੈਲ ਗਈ ਹੋਰਾਂ ਦੀ ਗੱਲ ਜੇ ਇਸ ਆਪਣੇ ਤਰੀਕੇ ਨਾਲ ਦੇਖਦਾ ਤੈਨੂੰ ਕੇਹਦਾ ਮਨ ਚਲਦੀ ਕਿ ਸ਼ਬਦ ਦੀ ਪੁਰਾਣੀ ਤਾਂ ਆਦਰਨ ਨੂੰ ਬਦਲਿੰਦਾ ਆਦਰਨ ਨੂੰ ਬਦਲ ਹੀ ਗਾਹੀਏ ਇੰਨੇ ਜੇ ਦੇਖਾ ਅਨੰਦ ਆਦਾ ਉਸੇ ਵੱਖਰੇ ਆਤਮਾ ਵਰਦੀ ਨਹੀਂ ਹੁੰਦੀ ਇੰਨਾ ਉਹਨੂੰ ਕੋਲੋਂ ਇਸ ਕਰਕੇ ਮੌਤ ਹੋ ਗਈ। ਜੂਜੂ ਤਾਂ ਹੋਈ ਹੈ ਸਾਡੇ ਸਰੀਰ ਤੇ। ਉਹਨਾਂ ਵੇਲੇ ਹੀ ਪਤਾ ਵੀ ਲੋਕਾਂ ਨੂੰ ਅਸਲੀ ਕੀ ਨਹੀਂ ਦੇ। ਨਾਲਾ ਉਹਨਾਂ ਨੂੰ ਪਤਾ ਹੋਊਗਾ। ਬੋਲੋ। ਜੇ ਲੋਕ ਦੇਖਦੇ ਨੇ ਅਸੀਂ ਉਹਨਾਂ ਦੇਖ ਕੇ ਉਹ ਗੱਲਬਾਤ ਲੋਕ ਦਾ ਸਿਰ ਦੇਖ ਕੇ ਗੱਲਬਾਤ ਕਰ ਦਿੰਦੇ। ਜਿਹੜੇ ਬਖਸ਼ੀਰ ਤੇ ਹੁੰਦੇ ਹੋਵੇ ਬਿਨਾਂ ਸਰੀਰ ਤੇ ਗੱਲ ਕਰਦੇ ਹੁੰਦੇ ਨੇ। ਉਹ ਤੇ ਸਰੀਰ ਦੇ ਹੁੰਦੇ ਨੇ। ਪਰ ਜਦੋਂ ਜੀਵਨ ਹੋਏ ਤੇ ਜੀਵਤ ਰਹਿਤ ਬਸ ਉਤਾਰ ਨਹੀਂ ਹੋ ਸਕਦਾ ਸ਼ਾਇਦ ਇਹ ਸਮਝਿਆ ਤੁਸੀਂ ਅੱਖਾਂ ਬਾਝੋਂ ਦੇਖੇ ਤੇ ਬਿਨੋ ਜੱਖਾਂ ਬਾਝੋਂ ਨਹੀਂ ਦੇਖਦੇ ਪਰ ਆਤਮਦਰਸ਼ਨ ਨਹੀਂ ਹੋ ਸਕਦਾ ਕਿ ਆਤਮਦਰਸ਼ਨ ਹੋ ਨਹੀਂ ਸਕਦਾ ਉਸ ਵੇਲੇ ਬੋਲਣ ਵੇਲੇ ਆਤਮਦਰਸ਼ਨ ਕਰਾ ਨਹੀਂ ਸਕਦੇ ਕੋਈ ਬੋਲ ਸਕਾਂਗੇ ਜੋ ਧੀਰ ਹੋਊਗਾ ਜਬ ਦੇਖਾਂ ਤਬ ਗਾਵਾਂ ਜਬ ਦੀਨ ਅੰਦਰ ਤਮਨ ਦਾ ਦੰਨ ਦਾ ਨਹੀਂ ਕਿਨ ਜਨਾ ਚਾਹੁੰਦਾ ਜਿੰਨਾ ਇਹਨਾ ਕੋਈ ਦੇਖਿਆ ਹੋ ਕੇ ਰਹਾ ਆਪ ਨੂੰ ਜੋ ਦੇਖਿਆ ਉਹ ਤੁਸੀਂ ਅੱਖਾਂ ਪਾਲੀਆਂ ਸਿਆ ਅੰਦਰ ਉਹ ਵੇਖਿਆ ਅਵਸਥਾ ਕੀ ਹੈ ਸਾਜਾ ਤੇ ਅਵਸਥਾ ਦਸੀ ਹੈ ਹੋਰ ਬਿਨਾਂ ਖੰਦ ਦੇ ਅੰਦਰਲੀ ਸਾਕਤ ਦੇ ਸਰੀਰ ਦੀ ਗੱਲ ਨਹੀਂ ਕੀਤੀ ਮੇਰੇ ਕਹਿੰਦੇ ਇਹ ਖਤਰੇ ਦੀ ਗੱਲ ਨਹੀਂ ਕੀਤੀ ਸਾਕਤ ਨੂੰ ਉਹਦਾ ਇਲਾਜ ਵੀ ਦੱਸਿਆ ਉਹ ਫਰਾਮੀ ਦੱਸਿਆ ਕਿਹਦੀ ਵਸਤਾ ਦੱਸ ਕੇ ਸਾਕਤ ਕੀ ਨੁਕਸਾਨ ਕਰਦਾ ਸਾਕਤ ਤੋਂ ਬਚ ਕੇ ਰਹਿਣਾ ਹੁੰਦਾ ਹੈ ਸਾਕਤ ਦਾ ਸੂਰ ਵੀ ਭਲਾ ਆਚਾਰ ਰੱਖ ਗੋ ਇਹ ਸਭ ਕੁਝ ਦੇਖੇ ਨਾ ਨਹੀਂ ਕਹਿ ਸਕਦਾ ਸਬੂਤ ਨਾ ਬਣਾਇਆ ਹੂਦ ਅਧਿਕਾਰਤਾ ਵੀ ਗੁਨਾਹ ਆਪ ਕੋਈ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜੀ ਨਹੀਂ ਮੈਂ ਤਾਂ ਤੋ ਕੈਦੀ ਸੀ ਤੁਸੀਂ ਦੇਖੇ ਕਿ ਹੈ ਕੁਕਰੀਏ ਨਾ ਦੇਓ ਕੁਰਬਾਨੀ ਕੁਛ ਦੀ ਗੱਲ ਉਹ ਕਰਨ ਕਰਦੇ ਏਡਾ ਟੈਸਟ ਅਧਾਟਾ ਟੈਸਟ ਕੀ ਹੈ ਸਭ ਸੁਣਿਆ ਹੋਰ ਕਾਹ ਤੋਂ ਗਿਆ ਗੱਲ ਲੱਗੇ ਹੈ ਲੋਕ ਤੁਸੀਂ ਕਹੋ ਪਿਆ ਸੀ ਗਈਏ ਤੁਹਾਨੂੰ ਦਾ ਸਾਰੀਆਂ ਕੱਲਾਂ ਨੇ ਰਾਜਾ ਸਾਡੀਆਂ ਤੇ ਜੇ ਆਪ ਤੁਸੀਂ ਵੀਰੋ ਧਾਰਿਆ ਦੇ ਦੋਂ ਰਸ ਤੇ ਬੰਨ ਲਾਉਂਗਾ ਯਾਦਨਾ ਕੋਵਾਂ ਕੋਵਾਂ ਕੋਵਾਂ ਕੋਵਾਂ ਜੇ ਅਸੀਂ ਇੱਕ ਗੱਲ ਮੰਨ ਲਈਏ ਸਾਡੀਆਂ 50 ਗੱਲਾਂ ਕਈਆਂ ਹੋਈਆਂ ਸਾਡੇ ਆਪਣੇ ਨਾਲੇ ਦਾ ਦੋਸ਼ ਜੀ। ਜੋ ਗਲਤ ਅਗਮਟ ਕਰ ਲਈ ਉਹਨੇ ਸਾਡੇ ਖਿਲਾਫ ਖੜੀ ਰਹਿਣਾ ਜੀ ਉਸੇ ਨੂੰ ਇਸਤੇਮਾਲ ਕਰੀ ਜਾਣਾ। ਹੋ ਸਕਦੇ ਨਹੀਂ ਸਾਡਾ ਉਹ ਝੂਠ ਨਹੀਂ ਸਾਡੇ ਆੜੇ ਆ ਜਾਣਾ। ਜੇ ਝੂਠ ਬੋਲਿਆ ਉਹ ਝੂਠੇ ਆੜੇ ਆ ਜੀ ਸਾਡੇ। ਸਾਡੇ ਨਾਲ 15 ਤਾਂ ਦੂਰ। ਸਾਡੇ ਨਾਲ ਗੱਲ ਨਹੀਂ ਜੁੜਦੀ। ਇਹਦੀ ਜਾਣਨੇ ਦਾ ਲੱਗ। ਕੋਈ ਵੀ ਪਤਾ ਵੀ ਗੱਲ ਕੀ ਹੈ। ਪਤਾ ਨਹੀਂ ਹੱਸਦਾ। ਜੋ ਦੇਖਾ ਨਾ ਵਗਾਵਾ ਦਾ ਮਤਲਬ ਨਹੀਂ। ਨਾਲੇ ਗਰਮੂ ਕੇ ਦੇਖ ਦਗਾ। ਜੇ ਤੁਸੀਂ ਦੇਖਿਆ ਨਹੀਂ ਦਿਖਾਉਂਦੇ। ਜੋ ਦੇਖਿਆ ਪ੍ਰਤੱਖ ਹੈ। ਬਹੁਤ ਜੀ ਪ੍ਰਤੱਖ ਕਰ ਦੇਣਾ ਚਾਹਜਿ ਤਨਾ ਆਪਾਂ ਨੇ ਵਸ ਤੇ ਹਨ ਇਹ ਤਾਂ ਲਿਖਿਆ ਹੋਇਆ ਹੈ ਉਹਨਾਂ ਨੂੰ ਵੀ ਨਾਲ ਲਿਖ ਰਿਹਾ ਤਾਂ ਕੀ ਦੇਖਿਆ ਕੀ ਦੀਦਾ ਸੀ ਆਇਆ ਉਹ ਕਹਿੰਦੇ ਜਦੋਂ ਇੰਨਾ ਗਿਆਨ ਹੋ ਜਵੇ ਕੋੜ ਗੁਰ ਪ੍ਰਸਾਦ ਆਪਣਾ ਸੁਝਾ ਉਸ आप ਨਾਲ ਆਪਣੇ ਆਪ ਦੀ ਸੋਝੀ ਹੁੰਦੀ ਹੈ ਜਿਤਨਾ ਆਪਣੇ ਆਪ ਦੀ ਦਾਲਾ ਕਿਰੋ ਜਨਾ ਆਪਣਾ ਸੁਜੇ ਨੀ ਕਮੀ ਆਇਆ ਅਜਾ ਵੀ ਇਨਾ ਧਿਆਨ ਲੈ ਲੈ ਗਿਆਨ ਦੀ ਜੇ ਇਹਦੇ ਹਾਂ ਗਿਆਨ ਕੋਣ ਪੜਦਾ ਗਿਆਨ ਭਰ ਗਿਆ ਉਦੋਂ ਖੜਕਾ ਪੈਖ ਪਾਹੇ ਛੱਡਦੇ ਹੋ ਕਾਪਾ ਖੜਤਾ ਛੱਡੇ ਜੋ ਉੱਪਰ ਜਾ ਫੇਰ ਲੋੱਦਿਆ ਗਿਆ ਪੂਰਾ ਫੇਰ ਉਹਨੇ ਖੜ ਜਾਣਾ ਖੜਾ ਦੇਖ ਲੈਣਾ ਮਨ ਖੜੇ ਦੇ ਬਿਨਾ ਦੀਦਾ ਹੀ ਨਹੀਂ ਜਾਂ ਜਾਂਦਾ ਚਾਟਾ ਇਧੇ ਰਿਉ ਜਿੱਤਿਆ ਜਾਂਦਾ ਉਹ ਸਾਰੀ ਖੇਡ ਜਦ ਵਿੱਚ ਹੋ ਜਾਂਦੀ ਜਿੱਕਰ ਹੱਥ ਗਿਆ ਸੁੱਚ ਧੱਪੀ ਲੈਟ ਹੋਈ ਉਹ ਜਿਹੜਾ ਸੱਪ ਦੀ ਉਹਦਾ ਰੱਸੀ ਸੀ ਅਸੀਂ ਤਾਂ ਸੱਪ ਮੰਨੀ ਗਏ ਸੀ ਉਹ ਜਾਰ ਸੱਪ ਦੀ ਰੱਸੀ ਬਣ ਗਈ ਪਾਉਣਾ ਚਾਹ ਕੇ ਪਰੇ ਮਨ ਚੀਲੇ 당ਕਤੀ ਕਹਿੰਦੇ ਇਹਨੂੰ ਛਤਾਂ ਅਧਿਕਾਰ ਨਾਲ ਜੋ ਕਹਦੇ ਨਾ ਲੜਕਿਆ ਕਰਾਂਗੇ ਤੇ ਬਣਾ ਦੇ ਉਹੀ ਰੱਸੀ ਆ ਉਹੀ ਮਨ ਸੱਪ ਸੀ ਉਹਦਾ ਰੱਸੀ ਰਹਿ ਗਿਆ ਫਿਰ ਉਹ ਜੀ ਨੇ ਤਰੀ ਭਾਇਆ ਦਸੀ ਗੀ ਜੇ ਤਰੀ ਬਾਸਾ ਕੱਥੇ ਹੋ ਕਰ ਮੇਰ ਵਧਾਨ ਬਲਾਨੀ ਕਹਦੀ ਆ ਤੁਹਾਡੀਆਂ ਤੇ ਮੇਰ ਪਰਬਤ ਤੇ ਬੈਠਾ ਸੀ ਨਾ ਜੀਬ ਉਹ ਸ਼ਿਵ ਸਮੇਰ ਪਰ ਤੇ ਬਾਦ ਨੂੰ ਕਹਿੰਦੇ ਨੇ ਉਹ ਦਿਮਾਗ ਦੀ ਪਧਾਨੀ ਚਲਾਈ ਆ ਫਿਰ ਮਾਨ ਨਾਲ ਪੰਜਤਨੇ ਇਕੱਠੇ ਹੋ ਕੇ ਚਲਾਈਏ ਭਾਈ ਪੂਰੀ ਤਾਕਤ ਨਾਲ ਹਾਂ ਜੀ ਆਪ ਸੁਝੇ ਇਸ ਕੀ ਜਾਨੋ ਕ੍ਰਿਸ਼ਨਾ ਮੁਝੇ ਸਮਝੋ ਵੀ ਤ੍ਰਿਸ਼ਨਾ ਬੜੀ ਤੇ ਇਸਨਾ ਫੁੜੀ ਗਈ ਲੋਕਾਂ ਨੂੰ ਕਿਹਾ ਹੈ ਜਿਹਦੀ ਭੁਜੇ ਹੁੰਦਾ ਉਹਨਾਂ ਮੇਰੇ ਹੁੰਦੀ ਆ ਦਸੂਆ ਨੂੰ ਇਹ ਜਿਹੜੀ ਤ੍ਰਿਸ਼ਨਾ ਭੁਜੇ ਲੋਕਾਂ ਨੂੰ ਕਿਹਾ ਵੀ ਉਹ ਇਸ ਤਰ੍ਹਾਂ ਹੁੰਦੀ ਗਲਤ ਨਾ ਸਮਝ ਲੈ ਉਹਨੂੰ ਵੀ ਤ੍ਰਿਸ਼ਨਾ ਲੂਆ ਵੀ ਗੁਰੂ ਘਰ ਚ ਵੀ ਆਉਂਦਾ ਸਮਾਂ ਛੜਾਵਾ ਉਹਦਾ ਹੁੰਦਾ ਤਾਂ ਉਸ ਦੀ ਗੱਲ ਕਹਾ ਦਨਾ ਇਸ ਤ੍ਰਿਸ਼ਨਾ ਹੀ ਆਦੀ ਸਾਡੀ ਤ੍ਰਿਸ਼ਨਾ ਮੁਡੀ ਹੋਈ ਹੈ ਉਹਦਾ ਤ੍ਰਿਸ਼ਨਾ ਬڑے ਭਾਈ ਨੂੰ ਛੜਾਵੇ ਦੀ ਸਤਿ ਰਖਤੀ ਗੁਰਪ੍ਰਸਾਦ ਆਪਣਾ ਜਿਹੜਾ ਆਤਮ ਗਿਆਨ ਕਰਾ ਸਕਦਾ ਦਰਸ਼ਨ ਕਰਾ ਸਕਦਾ ਉਹਦੀ ਤ੍ਰਿਸ਼ਨਾ ਉਝ ਹੁੰਦੀ ਦੀ ਆ ਗੱਲ ਕਹਿ ਰਹੇ ਮੈਂ ਆਤਮ ਦਰਸ਼ਨ ਕਰਾ ਰਿਹਾ ਤੂੰ ਖਦਾ ਨਹੀਂ ਰਿਹਾ ਤੇਰੇ ਤ੍ਰਿਸ਼ਨਾ ਮੇਰੀ ਜਾਏਗੀ ਇਸ ਤਰ੍ਹਾਂ ਦੀ ਗੱਲ ਹੈ ਕਿ ਕਹੇ ਸੰਪੋਧਨ ਕਰਕੇ ਆਪਣੇ ਵੱਡੇ ਭਰਾ ਨੂੰ ਜਿਹੜਾ ਬਰਾਬਰ ਬਣਿਆ ਬੱਚਾ ਉਹਦਾ ਪਰਲ ਮੇਨ ਸੈਂਟਰ ਤੋਂ ਹੋਈ ਹੈ ਗੁਰੂ ਉਹੀ ਬੈਠਾ ਮੇਨ ਸੈਂਟਰ ਹੋਈ ਬਾਕੀ ਸਾਰੇ ਨਾਲ ਲੱਗੇ ਉਹ ਬੰਦਾ ਤਾਂ ਬੋਲ ਹੀ ਬੰਦਾ ਹੋਵੇ ਸੱਚਾ ਭਾਈਓ ਖਰਾਬ ਹੋਵੇ ਵੜਾ ਹੋਵੇ ਤੇ ਬਦੂ ਮਤੋਂ ਤਾਂ ਅਰੇ ਚੰਦ ਨਾ ਆਵੇ ਉਸਪੋਰਟ ਆਜੰਤਿਆ ਆ ਰਹੇ ਠੀਕ ਹੈ ਆ ਕੇ ਸਾਰੇ ਆਦੋਲੇ ਅੱਜ ਵੀ ਇਹ ਜੀਜਨ ਅੱਜ ਵੀ ਇਹ ਅੱਜ ਵੀ ਸੇਵ ਨਹੀਂ ਵੀ ਜੀਜਨ ਸਹਿਬ ਠੀਕ ਹੋਈ ਸਾਧ ਸੰਗੀ ਹਰ ਹਰ ਜਸ ਕਹਿਤ ਸਰਬ ਤੇ ਉਹ ਹਰ ਜਨ ਰਹਤ ਸਾਧ ਸੰਗੀ ਜਿਹੜਾ ਆਪਣੇ ਮਨ ਨੂੰ ਸਾਧ ਲਵੇ ਸਾਧ ਕੇ ਮਨ ਨੂੰ ਸਾਧਦੇ ਤੋਂ ਬਾਅਦ ਹਰ ਸਰਜਸ ਕਰੇ ਸਾਧ ਸੰਗੀ ਹਰ ਉਹ ਸਾਧ ਹਰ ਹਰ ਤੇ ਕਉ ਮਰੋ ਜਿਹੜਾ ਅੰਤਰਾਤਮ ਹਾਰ ਅੰਦਰ ਬੈਠਾ ਉਹ ਆਪਣੇ ਮਨ ਤੋਂ ਸਾਧੂ ਦੇ ਆਪਣੇ ਸੱਜੇ ਤੋਂ ਉਹਦਾ ਹੀ ਮਨ ਖਰਾਬ ਹੋਇਆ ਉਹਦੇ ਬਾਅਦ ਉਹ ਹਰ ਫਿਰ ਜਸ ਕਰੇ ਸਾਧ ਕੇ ਆਪਣੇ ਸੱਜੇ ਨੂੰ ਹਾਰਹਿ ਜੋ ਹਰ ਜਸ ਕਰੇ ਆਤਮ ਜਸ ਕਰੇ ਹਸਦਾਈ ਜਸ ਕਰੇ ਆਪਣੇ ਘਰ ਦੇ ਕਰੇ ਆਤਮ ਜਸ ਕਰੇ ਉਹ ਉਹ ਤਲਵਾਰ ਉੱਥੇ ਕੋ ਭਿਜਣੇ ਆਂਦੇ ਰਹੇ ਹੁਣੇ ਇੱਕ ਨਹੀਂ ਖੜੀਆ ਗੱਲ ਆਪਣਾ ਗੁੱਝੇ ਦੀ ਗੱਲ ਚੱਲ ਰਹੀ ਆ ਹਾਂ ਆਪਣੇ ਕੋਈ ਰਹਿਣੀ ਆਉਣ ਗੱਲ ਇਹ ਦੂਜਾ ਕੀ ਰਹਿਣਾ ਹੁਣ ਦੂਜਾ ਖਤਮ ਐ ਸਰਗੋਤ ਹੈ ਹਰ ਜਨ ਰਹਿਤ ਕੋਈ ਰੋਗ ਨਹੀਂ ਹੁੰਦਾ ਕਾਰ ਨਹੀਂ ਹੁੰਦਾ ਕੋਈ ਵੀ ਰੋਗ ਨਹੀਂ ਹੁੰਦਾ ਜੇ ਉਹ ਵੀ ਦੇਖੇ ਨਾ ਬਹੁਤ ਲੋਕ ਇੱਕ ਰੋਗ ਤੋਂ ਉਹ ਮੈਨ ਰੋਗ ਹੈ ਰੋਗ ਪਰ ਬਿਆਦ ਵੀ ਹੁੰਦੇ ਸਰਗੋਤ ਆ ਗਿਆ ਸਰਗੋਤ ਆ ਗਿਆ ਅੰਤਨ ਕੇਸਤ ਕੇਵਲ ਵਿਗਿਆਨ ਸੋਈ ਨਿਰਵਾਣ ਅੰਤਨ ਕੇਸਤ ਕੇਵਲ ਵਿਗਿਆਨ ਜਿੱਤੇ ਕੇਵਲ ਕੀ ਸੰਦਾਈ ਮੁਖਾਨ ਕਰੇ ਗੁਰਬਾਨੀ ਦਾ ਮੁਖਾਨ ਕਰੇ ਹੋਰ ਕੋਈ ਗੱਲ ਨਾ ਹੋਵੇ ਜੀ ਜਦੋਂ ਫਾਜਰੀ ਪਹਿਜਸ ਵਿੱਚ ਨਾ ਕਰੇ ਨਾ ਕਰਸ ਕਰੰਤਬ ਉੱਥੇ ਕੁਝ ਹੋਰ ਹੋ ਰਿਹਾ ਸੀ ਗੁਰੂ ਘਰ ਦਾ ਇਹ ਕੁਝ ਹੋ ਰਿਹਾ ਸੀ ਸੰਗਤ ਵਿੱਚ ਪਾਹਨਾ ਬਾਸ਼ਾ ਜੀ ਹਾਜ਼ਰੀ ਵਿੱਚ ਉਹ ਦੂਏ ਪਾਸੇ ਦੀ ਹੋਰ ਛੁੱਟੀ ਜਾਂਦਾ ਰਹੋ ਵਾਓ ਸਭ ساری ਗੱਲਾਂ ਹੁੰਦੀਆਂ ਹੁੰਦੀਆਂ ਇੱਥੇ ਉਹਨਾਂ ਨੇ ਉਹਨਾਂ ਨੇ ਪਲਾਨ ਕਰਦੀ ਉਥੇ ਕੁਝ ਨਾ ਕੁਝ ਉਹ ਕੰਨਾ ਮੀਜਦਾ ਕੇਵਲ ਕੀਰਤਨ ਦਾ ਹੀ ਹਾਂ ਆਂਦਨ ਕੇਵਲ ਕੀਰਤਨ ਆਂਦਨ ਕੀਰਤਨ ਕੇਵਲ ਕੇਵਲ ਵਿਧਿਆਨ ਹੋਵੇ ਗ੍ਰਸਥ ਚ ਬੈਠਾ ਨਿਰਵਾਣ ਸ੍ਰੀਸ਼ੀ ਦਾ ਗੋਈਦ ਜੇ ਇਹਦਾ ਨਿਰਵਾਣ ਤਾਂ ਹੁੰਦਾ ਸ਼ਰਤ ਲਾਤੀ ਇਹ ਆ ਕਰੇ ਜੇ ਇਸੇ ਨਿਰਵਾਣ ਹੀ ਹੋ ਸਕਦਾ ਆਇਆ ਵਿੱਚ ਉਹ ਦਾ ਸੀ ਨਹੀਂ ਹੋ ਸਕਦਾ ਉਹ ਦਾ ਸੀ ਦਰਵਾਜ਼ਾ ਰਹੇ ਤੇ ਨਹੀਂ ਹੋ ਸਕਦਾ ਜੇ ਇਹ ਵੀ ਚੌਥੇ ਪਾਸੇ ਮੇਰਾ ਵੀ ਬਾਪ ਸੀ ਤੇ ਦਾ ਵੀ ਬਾਪ ਹੈ ਨਾਲੇ ਨਹੀਂ ਹੈ ਕਿ ਨਾਲਾ ਕਿ ਇਸ ਮਨ ਕੇਵਲ ਮੁਕਤ ਆਪਰੇ ਬਖਸ਼ਾਂ ਤੋਂ ਬਿਨਾਂ ਕੋਈ ਗੱਲ ਉਹਨੂੰ ਚੁੱਕੀ ਉਹ ਨਾਲ ਕੋਈ ਗੱਲ ਕਰੇ ਨਾ ਕੀਰਤਨ ਕੇਵਲ ਹੋ ਗਿਆ ਇਹ ਬਿਲਕੁਲ ਖਿਆਲ ਗ੍ਰਸਤ ਕੋਈ ਨਹੀਂ ਦੱਸ ਤਾਂ ਗ੍ਰਸਤ ਮਨ ਨਿਰਵਾਣ ਸਰਦਾ ਉਤੇ ਹੈ ਜੀ ਇਹ ਗੱਲ ਨਾਲ ਗਿਆਨ ਨਖੜਿਆ ਗੁਰੂ ਕਰਨਵਾਰ ਉਸ ਤੇ ਹੀ ਹੁੰੂ ਕੀਤਾ ਅਦਵਾਣ ਕਾਹਨ ਹੂ ਤੋ ਰਿਗਹਿ ਬਾਣੀ ਰਿਗਹਿ ਗੁਰੂ ਬੜਚੂਗ ਛੱਤਾਂ ਨਹੀਂ ਹੋਈਆਂ ਇਹ ਗੱਲਾਂ ਕਰ ਕਹਿੰਦੇ ਸੀ ਫਿਰ ਸੰਗਤ ਦੇਖਦੀ ਸੀ ਪਰਖਦੀ ਸੀ ਕਿ ਕੀ ਆ ਤਨ ਕੀ ਤਨ ਕੇਵਲ ਉਹ ਨਹੀਂ ਚੱਲਦਾ ਇੱਥੇ ਚੱਲਦਾ ਇਹ ਵੀਟਰ ਦੱਸ ਨਹੀਂ ਆਪਣੀ ਸੰਗਤ ਨੂੰ ਵੀਟਰ ਦੱਸ ਅਗਲੇ ਗੱਲਾਂ ਕੋ ਕਰਦੇ ਤਾਂ ਕਹਿੰਦੇ ਵੀ ਆ ਗੱਲ ਹੁੰਦੀ ਹੈ ਤੁਸੀਂ ਪੁੱਛੋ ਹੈ ਮਨਿਆ ਪਾਣੀ ਦੱਸੋ ਆਦਾ ਇੱਥੇ ਆ ਕੇ ਦੱਸੋ ਇਹ ਤਾਂ ਇਧਰ ਇੱਕਲ ਚਲਦੀ ਹੈ ਉਧਰ ਚਲਦੀ ਹੈ ਕਿਉਂ ਦੀ ਜਲਦੀ ਇਹ ਕਰਕੇ ਸੰਬੰਧੀ ਗੁਰੂ ਵਾਲੀ ਉਹ ਨਹੀਂ ਜੁੜਦੀ ਬਿਲਕੁਲ ਨਹੀਂ ਤੇ ਤਾਂ ਅੱਛਾ ਹੈ ਯਾ ਦੇਖੋ ਭਾਈ ਜੇ ਸਿਆਖ ਕੁਝ ਹੁੰਦੇ ਚਲੇ ਲੋ ਮੈਂ ਨਹੀਂ ਕਹਾਂ ਉੱਥੇ ਨਾ ਜਾਓ ਆਪੇ ਛੋਣਾ ਚਾਹੀਦਾ ਉਹ ਭੁੱਖ ਗਿਆ ਸੀ ਥੋੜਾ ਬੋਤਾ ਗਿਆਨ ਕਰ ਦਿੱਤੇ ਸੀ ਸਤਿ ਸੰਗਤ ਵੀ ਮੈਂ ਸਾਰਾ ਦਿਨ ਹੋਰੇ ਚੱਲਦਾ ਸੀ गाने एक ऊपर जिस जल की आशा इसकी कटीए जम की फसल एक ऊपर जिस जल की आशा फिर जेड़े जल की आशा इक पे रह गई कोई देवी देवता हो ना मंदिर जावे इसकी कटीए जम की फसल एक दिन हो गया तो ਉਹ ਕਹਿੰਦੇ ਤੇ ਅਸੀਂ ਵਿਚਾਲੇ ਹਾਂ ਵਿਚਾਲੇ ਹੁੰਦੇ ਵਿਚਾਲੇ ਵਿਚੋਲਾ ਚਾਹੀਦਾ ਵਿਚਾਲੇ ਗੁਰੂ ਚਾਹੀਦਾ ਇਹ ਕਹਿੰਦੇ ਡਾਇਰੈਕਟ ਪ੍ਰਣਾਚਰ ਕਰੂ ਵਿਚਾਲੇ ਨੂੰ ਵਿਚੋਲਾ ਵੀ ਵਿਚੋਲੇ ਨੂੰ ਮੰਦਾ ਜੋ ਵੀ ਵਿਚੋਲੇ ਨੂੰ ਮੰਦਾ ਇਹ ਕਹਿੰਦਾ ਵਿਚੋਲਾ ਨਹੀਂ ਚਾਹੀਦਾ ਡਾਇਰੈਕਟ ਸਾਰਾ ਸਾ ਜਿਹੜਾ ਧਾਰਕ ਹੁਕਮਾਂ ਨਾਲ ਜੁੜਿਆ ਹੋਇਆ ਪਰਮੇਸ਼ਰ ਦੇ ਹੁਕਮਾਂ ਨਾਲ ਜੁੜਿਆ ਹੋਇਆ ਧਾਰਕ ਚਾਹ ਲੈ ਕੋਈ ਅਸੀਂ ਇਹ ਕਹਿੰਦੇ ਆ ਸੱਤ ਬਚੋਲਾ ਕਹਿੰਦੇ ਨੇ ਹੈਗਾ ਉੱਦਾਂ ਸਾਰੇ ਮੰਨ ਨੇ ਠੀਕਾ ਕਰ ਗਏ ਨੇ ਸਾਰੇ ਇਹ ਅਰਥ ਗੀਣੇ ਅਰਥ ਕਰਦੇ ਨੇ ਉਹ ਅਰਥ ਸਾਡੇ ਕੋਲ ਨਹੀਂ ਆ ਜਿਹੜੇ ਅਰਥ ਐ ਨੇ ਕੁਰਬਾਨੀ ਵਾਲੇ ਇਹ ਰੱਦ ਕਰਦੇ ਨਾ ਸੇ ਘਾਤੂ ਬਦਾ ਦੀ ਜੀ ਤਾਂ ਯਾਦ ਇਹ ਹੋਣਾ ਸਿੱਖੀ ਦਾ ਮੋਬੀ ਇਹ ਸਿੱਖੀ ਵਾਲੇ ਅਰਥੇ ਵੀ ਰਹੇ ਸਿੱਖੀ ਵਾਲੀ ਵਿਚਾਰਤਾ ਹੈ ਜਾਂ ਦਸਰੀ ਗਈ ਸਿੱਖੀ ਦੇ ਖਤਮ ਹੋਣਾ ਨਹੀਂ ਹੋਣਾ ਨਾ ਕੋਈ ਹੋਇਆ ਸੰਤਰੇ ਸੰਤ ਦਾ ਤਾਂ ਹੀ ਕਰਦੇ ਗੱਲਾਂ ਉਖੀਆਂ ਨੇ ਕਹਤਾ ਹੈ ਕਿ ਲਾਤਾਂ ਸਾਤਰ ਮੋਖਾ ਸੀ ਉਹ ਮੰਨਣੀ ਔਖੀਆਂ ਕਰਕੇ ਕਲਨ ਹੋ ਗਈ। ਛਾਈ। ਮਾਡਾ ਗੁਰੂ ਬੰਦੇ ਚ ਕਹਤਾ ਹੈ ਹਰਾਮ ਨਹੀਂ ਖਾਓ। ਜੂਰੇ ਹਾਂਜੀ। ਬਾਹਰ ਬ੍ਰਹਮ ਕੀ ਜਿਸਮਨ ਨਾਨਕ ਕਿਸੇ ਨਾਲ ਲਾਗੇ ਨੂ ਬਾਹਰ ਬ੍ਰਹਮ ਕੀ ਜਿਸਮਨ ਭੁੱਖ। ਇਹਨਾਂ ਜੋ ਬਾਹਰ ਬ੍ਰਹਮ ਭੁੱਖ ਹੈ ਨਾ ਇਹ ਨਹੀਂ ਸੰਭਦਾ ਨਰੇ ਬਸੇ ਹੋ। ਜਦ ਕੀ ਫਸਾ ਕਟਿੰ ਗਈ ਦੋ ਬਦਾਸ ਮਿਲਦੇ ਨੇ। ਇੱਕ ਉਪਰ ਜਿਸ ਜਨ ਕੀ ਆਸਾ, ਉਸ ਕੀ ਕਟਿਏ ਜਨ ਕੀ ਫਸਾ। ਦੋਹੇ ਬਦਾਸ ਮੁਕਤੀ ਹੋਣ ਲਈ ਆ ਜਾ। ਇੱਕ ਜਨਮ ਹੋਊਗਾ ਮਰਜੀ ਨਾ ਹੋਊਗਾ। ਜਨਮ ਤਾਂ ਕਿਜੀ ਰੋਲ ਹੋਊਗਾ, ਜੇ ਲੈਣਾ ਲਾਲਵਾ ਨਹੀਂ ਲੈਣਾ ਨਾਲ। ਅੱਲਾ ਬੋਲਦਾ ਰਹੇ ਹਾਦਿ। ਗੁਗਾਰੂ ਅਨਾ ਬੋਲਦਾ ਰਹੇ ਹੱਥ ਗੁਗਾ ਹੈ ਜਿੰਗੇ ਵਾਲਾ ਫਿੱਟ ਹੈ ਗੁਪੀ ਵਾਲਾ ਹੈ ਜੇ ਜ਼ਰੂਰ ਖਾਦਾ ਨੇ ਪਤਾ ਵੀ ਹੈ ਗੁਣ ਕਿ ਹੈ ਜਾਂਦਾ ਸਭ ਪਤਾ ਤੇ ਕਿਉਂ ਵਿਆਹ ਨਹੀਂ ਹੈ ਖਾਤਾ ਹੋਈ ਹੋਈ ਪਰ ਬੋਲ ਨਹੀਂ ਸਕਦਾ ਬੋਲਣ ਵਾਲੀ ਗੱਲ ਨਹੀਂ ਤੇ ਬੁਲਾਉਂਗਾ ਤਾਂ ਬੋਲੂਗਾ ਬੁਲਾਉਣ ਵਾਲਾ ਬੁਲਾਉਂਦਾ ਨਹੀਂ ਬੋਲੇ ਕਦੀ ਚਿੰਨਾਜਰਾ ਵਾ ਸੁਣਦੀ ਦੀ ਨਿਆਣਾ ਬੋਲਣ ਜਾਣਦਾ ਨਹੀਂ ਜਿਹੜਾ ਗੁੰਗਾ ਹੁੰਦਾ ਘੋੜਾ ਜ਼ਰੂਰ ਹੁੰਦਾ ਅੰਨਾ ਨਹੀਂ ਹੁੰਦਾ ਘੋੜਾ ਹੁੰਦਾ ਜੇ ਗੁੰਗਾ ਦਾ ਘੋੜਾ ਹੈਗਾ ਅੰਨਾ ਵੀ ਅਖਾੜੀ ਦਾ ਅਗਮਸਾ ਕਾਗਾ ਨਾ ਬੋੜਾ ਨਹੀਂ ਹੈ ਨਾ ਬੋੜਾ ਹੈਗਾ ਕਿ ਬੋੜਾ ਵਿੱਚ ਫੁੱਟਾ ਤਾਂ ਬੋੜਾ ਜ਼ਰੂਰ ਹੈ ਜਿਆਦੇ ਦੇ ਸੁਣਦਾ ਨਾ ਆਦ ਉਹ ਕੰਧਾਂ ਦੀ ਉਹ ਸੂਤ ਕਹਿੰਦਾ ਪਰ ਸੁਣਦਾ ਜਿਆਦਾ ਜਾਂ ਕੰਧਾਂ ਦੀ ਸੁਰਤ ਪੂਰੀ ਸਮਾਈ ਹੁੰਦੀ ਹੈ ਪੂਰਤ ਅਨੋਸੰਗ ਅੰਦਰੋਂ ਤੇ ਕੇ ਮਤਲੇ ਸਰਬਾ ਸਰਬਾਂ ਦੀ ਸੁਤਸਮਾ ਹੁੰਦੀ ਹੈ ਸਰਮਾ ਦੇ ਵਿੱਚ ਜੁੜਿਆ ਹੁੰਦਾ ਛੋਟੀ ਸ਼ਕਤੀ ਪੂਰੀ ਕਮ ਕਰਦੀ ਹੁੰਦੀ ਹੈ ਪੂਰੀ ਸ਼ਕਤੀ ਛੋਟੀ ਸ਼ਕਤੀ ਹੁੰਦੀ ਹੈ ਫੇਰ ਉਹ ਸ਼ਬਦ ਸੁਣਦਾ ਸਮਝ ਆਉਂਦੀ ਹੈ ਫੇਰ ਬੋਲਣ ਲੱਗਦਾ ਉਹਨਾਂ ਵਾਤੇ ਸੋਚੀ ਅੰਦਰੋਂ ਆਉਂਦੀ ਹੈ ਕਹਿਣਾ ਮਤਰਾ ਅਸਲ ਵਿੱਚ ਜੋ ਜੀਓਂ ਕੀ ਹੋਈ ਚੱਲਦਾ ਜਦੋਂ ਆਪਾਂ ਦੇਖੇ ਟੇਬਲ ਢਾਲਦੇ ਆਵੇ ਲਾ ਜਾਂਦੀ ਹੈ ਫੇਰੀ ਵਾਰ ਬੈਠੇ ਬੈਠੇ ਨੂੰ ਆਹ ਗੱਲ ਫੁੱਲਦੀ ਹੈ ਫੁੱਲਦੀ ਹੋਈ ਚਲੀ ਜਾਂਦੀ ਹੈ ਉਹ ਇਦਾਂ ਹੀ ਆਉਂਦੀ ਹੁੰਦੀ ਹੈ ਉਸੇ ਨੂੰ ਕਹਿਣਾ ਦੀ ਬਾਣੀ ਹਾਂ ਨਾਨਕ ਕਿਸੇ ਨਾਲ ਲੱਗੇ ਦੂ ਫਾਰ ਬ੍ਰਹਮ ਕੀ ਜਿਸ ਮਨ ਭੁੱਖ ਐਦੋਂ ਫਾਰ ਬ੍ਰਹਮ ਦੇ ਜਿਵੇਂ ਉਹ ਭੁੱਖ ਹੋ ਜਾ ਗਿਆ ਬੇਨਾਮ ਦੀ ਨਾ ਨੂੰ ਤੇ ਸਨਾਂ ਨਾਲ ਆਲੋਚਨਾ ਕਰਨੀ। ਕਹਿੰਦੇ ਉਹ ਮੁੱਖਾ ਜਾਂ ਬੁਰੀ ਲੋੜ ਬਣੀ। ਆ ਜਿਹੜਾ ਬੋੜੇ ਵਾਲਾ ਅਲਗੂ ਬਿਆੜਾ ਦੁੱਖ ਇਹ ਉਹਦਾ ਇਹ ਵੀ ਦੂਰ ਹੋ ਜਾਂਦਾ। ਉਹਦੇ ਫਿਰ ਦੁੱਖ ਨੇੜੇ ਆਵਦੀਆਂ। ਕੋਲਾ ਹੋਣਾ ਔਰ ਹੋਣਾ ਇਹ ਵੀ ਇੱਕ ਦੁੱਖ ਹੈ। ਕਹਿੰਦੇ ਫਿਰ ਉਹਦੇ ਲਾਗੇ ਨੇੜੇ ਨਹੀਂ ਆ ਦੁੱਖ। ਲਾਗੇ ਹਮਲਾ ਨੇੜੇ ਬਣੀ ਦੁੱਖ। ਜੇ ਪਾਰ ਬਰਤੋਂ ਤੇ ਕੋਖ ਲੱਗੇ ਆਵੇ ਫਿਰ ਉਹਦੇ ਦੁੱਖ ਨੇੜੇ-ਦਲੇ ਨਹੀਂ ਨੇ। ਉਹ ਇਹ ਦੁੱਖ ਵੀ ਛੱਡ ਜਾਂਦਾ ਉਹਨੂੰ ਸਾਚੇ ਰਾਮ ਦੀ ਲਾਟਾ ਭੁੱਖ ਜਦੋਂ ਉਸ ਭੁੱਖਾ ਖਾਏ ਤਿੰਨ ਉਹ ਵੀ ਦੁੱਖੇ ਹੋ ਜਾਂਦੇ ਦੋਖ ਹੈ ਦੋਖ ਦੋਖ ਨਾ ਦੁੱਖ ਹੈ ਦੋਖ ਤਖ ਰੂਪੇ ਹੁੰਦਾ ਕਬੀ ਆ ਸਾਡੇ ਕਮੀ ਆ ਕਮੀ ਆ ਤਾਂ ਦੋਖ ਕਬੀ ਨੂੰ ਕਹਿੰਦੇ ਨੇ ਉਹ ਤਾਂ ਬੜਨ ਵਾਲੀ ਜਿਹੜੀ ਦਿੱਕਤ ਹੈ ਤਕਲੀਫ ਹੈ ਜੋ ਬੜਨ ਵਾਲਾ ਕੱਟਿਆ ਉਹ ਦੋ ਪਾਣੀ ਪਿਆਣੇ ਦੋਸ਼ ਨੂੰ ਦੁੱਖ ਨੂੰ ਦੋਸ਼ ਹੈ ਹਾਂ ਦੋਸ਼ ਹੈ